ਜਿਸ ਵੇਲੇ ਕਾਫੀ ਸਮਾਂ ਲੰਘ ਗਿਆ ਦੇਖਿਆ ਇੱਕ ਦਿਨ ਲੰਘ ਗਿਆ ਨਾ ਤੇ ਹੁਣ ਧੰਨੇ ਭਗਤ ਨੇ ਕੋਈ ਸ਼ੱਕਿਆ ਕਹਿੰਦਾ ਜੇ ਤੂੰ ਨਹੀਂ ਖਾਣਾ ਤਾਂ ਮੈਂ ਵੀ ਨਹੀਂ ਖਾਣਾ ਅਕਾਲਪੁਰ ਖੈਨੇ ਮਜਬੂਰ ਹੋ ਗਏ ਕ੍ਰਿਸ਼ਨ ਭਗਵਾਨ ਪ੍ਰਗਟ ਹੋਣਾ ਪਿਆ ਕਹਿੰਦੇ ਲਿਆ ਭਾਈ ਮੈਂ ਤੇਰਾ ਸ਼ੱਕ ਲੈਣਾ ਜੋ ਕੁਝ ਤੂੰ ਕਹਿਣਾ ਜਿਸ ਵੇਲੇ ਸ਼ੱਕ ਲਿਆ ਸ਼ਕਾ ਕੇ ਉਹਨੂੰ ਖੁਸ਼ ਕਰ ਲਿਆ ਆਪ ਵੀ ਬੜਾ ਖੁਸ਼ ਹੋ ਗਿਆ ਆਪ ਵੀ ਸ਼ੱਕ ਲਿਆ ਜਿਸ ਵੇਲੇ ਉਹ ਫਿਰ ਜੱਪ ਲੋ ਫੋਣ ਲੱਗੇ ਤੇ ਉਹਨਾਂ ਦੀ ਲੱਤਾਂ ਫੜ ਕੇ ਉਹ ਬੰਨ ਲਈਆਂ ਇਹ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਕਹਿੰਦੇ ਹੁੰਦੇ ਸੀ ਕਿ ਜੱਡ ਭਲਾਈ ਲੱਸੀ ਤੇ ਟੰਗੀ ਪਾਈ ਰੱਸੀ ਉਹਨੂੰ ਬੰਨ ਲਿਆ ਕਹਿੰਦਾ ਹੁਣ ਕਿੱਥੇ ਚੱਲਿਆ ਜਿਹਦਾ ਕੰਮ ਖਾਈਦਾ ਹੁੰਦਾ ਤਾਂ ਕੰਮ ਵੀ ਕਰੀਦਾ ਹੁੰਦਾ ਲੋ ਉੱਥੇ ਵੱਜ ਗਿਆ ਭਗਵਾਨ ਉਹਨਾਂ ਨੂੰ ਕਹਿੰਦਾ ਹੁਣ ਮੇਰੇ ਮੱਕੇ ਨੱਕੇ ਮੋੜਨ ਵਾਲੇ ਆ ਖੂਹ ਚਲਾਉਣ ਵਾਲਾ ਆ ਹਾਲ ਵਾਉਣ ਵਾਲਾ ਆ ਸਾਰਾ ਕੰਮ ਕਿੰਨ ਕਰਨਾ ਉਹਨੂੰ ਕਰਨਾ ਪਿਆ ਭਗਵਾਨ ਨੂੰ ਉਹ ਕੰਮ ਤੇਰੇ ਪਾ ਕੇ ਨਤਾਂ ਨੂੰ ਰੱਸੀ ਬੰਨਿਆ ਪ੍ਰੇਮੀਆਂ ਨੇ ਤੇਰੇ ਪਾ ਕੇ ਨਤਾਂ ਨੂੰ ਰੱਸੀ ਬੰਨਿਆ ਪ੍ਰੇਮੀਆਂ ਨੇ ਤੈਨੂੰ ਪਾ ਕੇ ਨਤਾਂ ਭਗਵਾਨ ਮਜਬੂਰ ਹੋ ਗਏ ਦੇ ਨੱਕੇ ਵੀ ਮੋੜੇ ਜੋ ਕਹੀ ਗਿਆ ਕਰੀ ਗਏ ਉੱਤਰ ਲੋਚਨ ਜਿਹੜਾ ਸੀ ਇੱਕ ਦਿਨ ਉਧਰੋਂ ਦੀ ਖੇਤਾਂ ਦੇ ਕੋਲ ਦੀ ਲੰਘਿਆ ਤੋ ਕੀ ਦੇਖਦਾ ਆ ਵੀ ਤੰਨਾ ਤੇ ਕੱਲਾ ਕੰਮ ਕਰਨ ਵਾਲਾ ਤੇ ਦੀ ਖੇਤੀ ਤਾਂ ਬੜੀ ਹਰੀ ਭਰੀ ਏ ਕਿੱਦਾਂ ਹੋ ਗਈ ਉਹ ਪੁੱਛਦਾ ਆ ਕਹਿੰਦਾ ਤੰਨਿਆ ਕੀ ਹਾਲ ਚਾਲ ਐ ਕਹਿੰਦਾ ਮੋਜਾਂ ਲੱਗ ਗਈਆਂ ਠਾਕੁਰ ਤੂੰ ਦੇ ਹੁਣ ਤਾਂ ਮੈਨੂੰ ਕੁਝ ਕਰਨਾ ਹੀ ਨਹੀਂ ਪੈਂਦਾ ਉਹ ਕਹਿੰਦਾ ਹੈ ਹਾਂ ਕਹਿੰਦਾ ਦੇਖ ਉਹ ਨੱਕੇ ਮੇਰੇ ਮੋਰੀ ਜਾਂਦਾ ਖੂਬ ਹੀ ਤੇ ਮੈਂ ਤਾਂ ਆਰਾਮ ਨਾਲ ਬੈਠਾ ਉਹ ਕਹਿੰਦਾ ਕਿੱਥੇ ਉਹ ਕਹਿੰਦਾ ਆ ਖੜਾ ਹੁਣ ਉਹਨੂੰ ਅੱਖਾਂ ਨਾਲ ਨਹੀਂ ਸੀ ਤੇ ਉਹਨੂੰ ਕਿੱਥੋਂ ਦਿਸੇ ਉਹ ਕਹੀ ਜਾਵੇ ਨਹੀਂ ਫਿਰ ਧੰਨੇ ਭਗਤ ਨੇ ਭਗਵਾਨ ਦੀਆਂ ਮਿੰਤਾ ਕੀਤੀਆਂ ਕਿ ਏਨ ਮੈਨੂੰ ਇਹ ਦੀ ਕਿਰਪਾ ਹੋਈ ਹੈ ਨੇ ਨੇ ਮਿੰਤਾ ਕੀਤੀਆਂ ਭਗਵਾਨ ਦੀਆਂ ਕਿ ਇਹਦੇ ਕਰਕੇ ਤਾਂ ਮੈਨੂੰ ਆਪ ਜੀ ਦੀ ਪ੍ਰਾਪਤੀ ਹੋਈ ਇਹਨੂੰ ਦਰਸ਼ਨ ਦਿਓ ਤੇ ਉਹਨੂੰ ਦਰਸ਼ਨ ਹੋਏ ਪਰ ਜਿਹੜੇ ਤਰਲੋਚਨ ਦੇ ਸਾਖੀ ਮੈਂ ਸੁਣਾਉਣ ਦੀ ਕੋਸ਼ਿਸ਼ ਕਰਦੀ ਸੀ ਉਹ ਇੱਕ ਤਰਲੋਚਨ ਹੋਰ ਹੋਇਆ ਹੈਗਾ ਉਹ ਤਰਲੋਚਨ ਦੋਨੋਂ ਜਣੇ ਭਗਤ ਤੇ ਭਗਤਨੀ ਸੀ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਦੋਨਾਂ ਨੂੰ ਲਗਨ ਸੀ ਪਰ ਦੇ ਨਾਲ ਸਾਧਾਂ ਦੀ ਸੇਵਾ ਕਰਨ ਦੀ ਤੇ ਉਹਨਾਂ ਇੱਕ ਦਿਨ ਉਹਦੀ ਘਰ ਵਾਲੀ ਕਹਿੰਦੀ ਆ ਸੇਵਾ ਮੈਂ ਕਰ ਲੈਂਦੀ ਸੀ ਕਿਉਂਕਿ ਉਸ ਜ਼ਮਾਨੇ ਵਿੱਚ ਚੱਕੀ ਪੀ ਕੇ ਆਟਾ ਤੇ ਕੱਤ ਕੇ ਕੱਪੜਾ ਬਣਾਇਆ ਜਾਂਦਾ ਸੀ ਤੇ ਉਹ ਸਾਧਾਂ ਲਈ ਕੱਪੜੇ ਵੀ ਤਿਆਰ ਕਰ ਰੱਖਦੀ ਸੀ ਤੇ ਲੰਗਰ ਪਾਣੀ ਵੀ ਇੱਕ ਦਿਨ ਕਹਿੰਦੀ ਆ ਕੋਈ ਔਲਾਦ ਤੇ ਘਰ ਹੈ ਨਹੀਂ ਹੁਣ ਕੰਮ ਆਪਣੇ ਤੋਂ ਹੁੰਦਾ ਨਹੀਂ ਸਾਧਾਂ ਦੀ ਸੇਵਾ 'ਚ ਫਰਕ ਪਈ ਜਾਂਦਾ ਕਿੰਨਾ ਚੰਗਾ ਹੋਵੇ ਜੇ ਕੋਈ ਭਗਵਾਨ ਮੈਨੂੰ ਕਾਮਾ ਭੇਜ ਦੇਵੇ ਕੰਮ ਹੁੰਦਾ ਨੌਕਰ ਉਹ ਤੇ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਭਗਵਾਨ ਹੋਰੀ ਛੋਟੇ ਬਾਲਕ ਦਾ ਰੂਪ ਧਾਰਨ ਕਰਕੇ ਫਟੇ ਕੱਪੜੇ ਪਾ ਲੈ ਤੇ ਮੋਢੇ ਤੇ ਪਰਨਾ ਸੁਟਿਆ ਆ ਉਸ ਵਕਤ ਕੀ ਆਂਦੇ ਨੇ ਗੁਰਨਾਨ ਦੇਵ ਜੀ ਮੈਂ ਨਾਲ ਥੋੜਾ ਲਾਣਾ ਥੱਕ ਜਾਣਗੇ ਪੈੰਜੀ ਕਿ ਅੱਜ ਕੋਈ ਨੌਕਰ ਰੱਖ ਲੋ ਜੀ ਅੱਜ ਕੋਈ ਨੌਕਰ ਰੱਖ ਲੋ ਜੀ ਚਨਨਾਰੇ ਅੰਦਰੋਂ ਨਿਕਲ ਸਤਿ ਰੋਚਨਾਂ ਉਹ ਕੁਛ ਨਹੀਂ ਬੜੇ ਪਿਆਰ ਦੇ ਨਾਲ ਕੁਛ ਨਹੀਂ ਬੜੇ ਪਿਆਰ ਦੇ ਨਾਲ ਕੀ ਹੈ ਨਾਮ ਕੀ ਹੈ ਤੇਰਾ ਨਾਮ ਕੀ ਹੈ ਨਾਮ ਕੀ ਹੈ ਤੇਰਾ ਤੇ ਅੱਜ ਕੋਈ ਨੋਕਰ ਰੱਖ ran ਉਦੋਂ ਨਿਕਲੀ ਕਹਿੰਦੀ ਆ ਜਦ ਦੇਖਿਆ ਦਰਵਾਜ਼ੇ ਦੇ ਮੋਹਰੇ ਛੋਟਾ ਜਿਹਾ ਬਾਲਕ ਖੜਾ ਆ ਫਟੇ ਜੇ ਕੱਪੜੇ ਆ ਤੇ ਮੋਢੇ ਤੇ ਇੱਕ ਪਰਨਾ ਸੱਖਿਆ ਉਹ ਕਹਿੰਦੀ ਆ ਇਹ ਬਾਲਕ ਤੂੰ ਇੱਥੇ ਕਿਉਂ ਖੜਾ ਆ ਮੈਂ ਮੇਰਾ ਕਹਿੰਦਾ ਕੋਈ ਹੈ ਨਹੀਂ ਵੇ ਤਾਂ ਦੇ ਇੱਥੇ ਖੜਾ ਉਹ ਕਹਿੰਦੇ ਤੇਰੇ ਮਾਪੇ ਬੱਚਾ ਦੇਖ ਕੇ ਤਰਸਦਾ ਆ ਹੀ ਜਾਂਦਾ ਤੇਰੇ ਮਾਪੇ ਕਹਿੰਦਾ ਮੇਰਾ ਮਾਪੇ ਕੋਈ ਹੈ ਹੀ ਨਹੀਂ ਤੇਰਾ ਗਾਮ ਗਾਮ ਜਿੱਦਾ ਕਿਹਾ ਇੰਦਰਪੁਰੀਆ ਅੱਛਾ ਫੇ ਉਹ ਕਹਿੰਦੇ ਤੇਰਾ ਨਾਮ ਕੀ ਹੈ ਕਹਿੰਦੇ ਮੇਰਾ ਤੂੰ ਰਹਿੰਦਾ ਕਿੱਥੇ ਹੈ ਕਹਿੰਦੇ ਮੈਂ ਸਾਧਾਂ ਦੇ ਡੇਰੇ ਉਹ ਕਹਿੰਦੀ ਉਹਨ ਸੋਚਿਆ ਕਿ ਵਿਚਾਰੇ ਦਾ ਕੋਈ ਨਹੀਂ ਹੈਗਾ ਸਾਧਾਂ ਦੇ ਡੇਰੇ ਤੋਂ ਆਇਆ ਉਹ ਕਹਿੰਦੀ ਫੇ ਤੂੰ ਸਾਡੇ ਕੋਲ ਰਹਿਣਾ ਤੇ ਤੂੰ ਮੈਂ ਸਾਡੇ ਘਰ ਸਾਥ ਬੜੇ ਜਾਂਦੇ ਆ ਸਾਧਨ ਦੀ ਸੇਵਾ ਮੇਰ ਨਾਲ ਕਰਾਇਆ ਕਰੀ ਮੈਨੂੰ ਚਾਹੀਦਾ ਹੈਗਾ ਹੱਥ ਵਟਾਣ ਲਈ ਕਹਿੰਦੀ ਠੀਕ ਐ ਪਰ ਉਹ ਘਰ ਕਹਿੰਦੀ ਆ ਭਗਤਣੀ ਕਹਿੰਦੀ ਆ ਪਹਿਲਾਂ ਮੈਨੂੰ ਦੱਸ ਦੇ ਵੀ ਤੂੰ ਕਿੰਨੇ ਕ ਪੈਸੇ ਲੈਣੇ ਆ ਅਸੀਂ ਤੇ ਸਾਡਾ ਤਾਂ ਗੁਜ਼ਾਰਾ ਹੀ ਐ ਅਸੀਂ ਬਹੁਤੇ ਪੈਸੇ ਨਹੀਂ ਦੇ ਸਕਦੇ ਉਹ ਕਹਿੰਦੇ ਕਿ ਮੈਨੂੰ ਪੈਸਿਆਂ ਦੀ ਲੋੜ ਹੀ ਨਹੀਂ ਐ ਮੈਨੂੰ ਤਾਂ ਰੋਟੀ ਕੱਪੜਾ ਚਾਹੀਦਾ ਹੋਰ ਕੁਝ ਚਾਹੀਦਾ ਨਹੀਂ ਕਹਿੰਦੀ ਇਹ ਤਾਂ ਬੜੀ ਚੰਗੀ ਗੱਲ ਐ ਹਾ ਜੋ ਜੀ ਅੰਦਰ ਬੁਲਾ ਲਏ ਬਸਤਰ ਦਿੱਤੇ ਨਵੇਂ ਪਾਣ ਕਹਿੰਦੇ करो तो ਤੇ ਨਵੇਂ ਬਸਤਰ ਪਾਓ ਉਹਨਾਂ ਨੇ ਨਵੇਂ ਬਸਤਰ जिस ਲਏ ਪਾ ਕੇ ਜਿਸ ਵੇਲੇ ਤਰਲੋਚਨ ਆਂਦਾ ਬਾਣੀਆਂ ਸੀ ਉਹ ਦੁਕਾਨ ਸੀ ਉਹਨਾਂ ਦੀ ਤੇ ਦੁਕਾਨ ਤੋਂ ਆਂਦਾ ਆ ਕੇ ਦੇਖਦਾ ਤੇ ਘਰ ਵਾਲੀ ਨੇ ਸਾਰਾ ਕੁਝ ਦੱਸਿਆ ਕਿ ਐਸੇ ਤੇ ਇਸ ਤਰ੍ਹਾਂ ਹੈਗਾ ਤੇ ਮੈਂ ਕੰਮਾਂ ਰੱਖ ਲਿਆ। ਇਹਨੂੰ ਰੋਟੀ ਕੱਪੜੇ ਚਾਹੀਦਾ। ਉਹ ਦੇਖ ਕੇ ਕਹਿੰਦਾ ਭਗਤ ਫੇਰ ਵੀ ਭਗਤ ਹੀ ਹੁੰਦੇ ਆ। ਕਹਿੰਦਾ ਇਹ ਕੋਈ ਸੁਧਾਰਨ ਨਹੀਂ ਲੱਗ ਰਿਆ ਮੈਨੂੰ। ਕੰਮਾਂ ਇਹਦਾ ਖਿਆਲ ਰੱਖੀ ਜ਼ਰੂਰ। ਕਹਿੰਦੀ ਠੀਕ ਐ। ਹੁਣ ਉਹ ਜਿਸ ਵੇਲੇ ਕੋਈ ਵੀ ਗੱਲ ਹੋਵੇ। ਕਹਿੰਦਾ ਮਾਤਾ ਜੀ ਮੈਂ ਕੀ ਕਰਾਂ? ਉਹ ਕਹਿੰਦੀ ਵੀ ਹੁਣ ਪ੍ਰਸ਼ਾਦਾ ਪਾਣੀ ਸਾਧਾਂ ਦੀ ਜਿਹੜਾ ਪਾਣੀ ਵੀ ਬਣਾਤਾ ਸਫਾਈ ਵੀ ਹੋ ਗਈ ਘਰ ਦੀ ਹੁਣ ਉਹ ਭਗਵਾਨ ਸੀ ਉਹਨੂੰ ਕੀ ਪਤਾ ਕਹਿੰਦੀ ਬੜਾ ਫੁਰਤੀਲਾ ਵਿਚਾਰਾ ਥੱਕ ਗਿਆ ਹੋਣਾ ਉਹ ਬੈਠਾ ਕਹਿੰਦਾ ਮਾਤਾ ਜੀ ਮੈਨੂੰ ਨਾ ਦਾਣੇ ਕੱਢ ਕੇ ਦੇ ਦੋ ਮੈਂ ਚੱਕੀ ਨਾਲ ਪੀ ਕੇ ਰੱਖ ਲਾਂ ਕਹਿੰਦੀ ਮੈਂ ਇਹ ਪਾਪ ਨਹੀਂ ਕਰਨਾ ਕਿਉਂਕਿ ਤੂੰ ਤਾਂ ਸਵੇਰ ਦਾ ਕੰਮ ਕਰ ਕਰਕੇ ਥੱਕ ਗਿਆ ਤੇ ਮੈਂ ਜੇ ਤੈਨੂੰ ਹੁਣ ਦਾਣੇ ਦੇਤੇ ਮੈਨੂੰ ਤਾਂ ਤਰਲੋਚ ਭਗਤ ਤੇ ਬਹੁਤ ਗੁੱਸੇ ਹੋਊਗਾ ਉਹ ਤਾਂ ਕਹਿੰਦੇ ਸੀ ਤੇਰਾ ਖਿਆਲ ਰੱਖਣਾ ਕਹਿੰਦਾ ਠੀਕ ਹੈ ਮਾਤਾ ਜੀ ਤੁਸੀਂ ਆਰਾਮ ਕਰੋ ਮੈਂ ਆਪੇ ਕੱਢ ਲੈਣਾ ਜਿੱਥੇ ਦਾਣੇ ਆ ਕੱਢ ਲੈ ਆਟਾ ਫੀ ਲਿਆ ਰੱਖ ਦਿੱਤਾ ਹੁਣ ਉਹ ਭਗਤ ਨੇ ਕਿਹਾ ਸੀਗਾ ਕਿ ਇਹਦਾ ਇਹ ਇਨਸਾਨ ਸਧਾਰਨ ਨਹੀਂ ਹੈਗਾ ਕੰਮ ਇਹਦਾ ਖਿਆਲ ਰੱਖੀ ਇਹ ਭਗਵਾਨ ਨੇ ਖਾਸ ਭਗਤ ਭੇਜਿਆ ਆਪਣੇ ਕੋਲ ਉਹਨੂੰ ਇੰਨੀ ਨਹੀਂ ਸੀ ਹਲੇ ਸਮਝ ਆਈ ਕਿ ਭਗਵਾਨ ਆਇਆ ਕਹਿੰਦੀ ਠੀਕ ਐ ਹੁਣ ਉਹਨਾਂ ਨੂੰ ਕੰਮ ਇੰਨਾ ਵੱਡਾ ਉਹ ਕਰੇ ਤੇ ਜਦੋਂ ਪ੍ਰਸ਼ਾਦਾ ਦੇਣ ਉਹ 2 ਦੇ ਵੀ 2 ਛੱਕੇ ਵਹਿ ਜਾਣ 4 ਦੇ ਚਾਰ 4 ਛੱਕੇ ਵਹਿ ਜਾਣ ਉਹ ਕਹਿੰਦੀ ਵੀ ਭਗਤਾਂ ਨੇ ਮੈਨੂੰ ਕਿਹਾ ਸੀਗਾ ਕਿ ਇਹਦਾ ਖਿਆਲ ਰੱਖਿਓ ਪਰ ਇਹ ਕਿਤੇ ਵਿਚਾਰਾ ਭੁੱਖਾ ਹੀ ਨਾ ਰਹਿੰਦਾ ਹੋਵੇ ਹੋਰ ਨਾ ਮੈਨੂੰ ਗੁੱਸੇ ਹੋਣ ਭਗਤ ਜੱਜਨ ਪਤਾ ਲੱਗ ਗਿਆ ਉਹ 2 2 ਜਿਆਦਾ ਪ੍ਰਸ਼ਾਦਾ ਦੇਣੇ ਨੂੰ ਸ਼ੁਰੂ ਕਰ ਦਿੱਤੇ ਉਹਨੂੰ ਕਿ ਅੱਜ ਹੋਰ ਅੱਜ 2 4 ਦੇ ਤੇ 6 ਦੇ ਤੇ ਕਰਦੇ ਕਰਦੇ ਉਹਨੇ ਕਾਫੀ ਉਹਨੂੰ ਗਿੰਨੀ ਗੈਂਟੀ ਤੋਂ ਜ਼ਿਆਦਾ ਹੀ ਪ੍ਰਸ਼ਾਦੇ ਦੇਣੇ ਸ਼ੁਰੂ ਸਭ ਸ਼ੱਕ ਲਿਆ ਕਰ ਜਿੰਨੇ ਮਾਰੇ ਰੱਖੇ ਸਾਬ ਸ਼ੱਕ ਲਿਆ ਕਰੇ ਇੱਕ ਦਿਨ ਉਹ ਕਹਿੰਦੀ ਐ ਇਦਾਂ ਨਹੀਂ ਗੱਲ ਬੰਦੀ ਕਿ ਮੈਂ ਇਹਦੀ ਬਸ ਕਰਾਣੀ ਐ ਜਿੱਦਣ ਇਹ ਬਸ ਕਰ ਮੈਨੂੰ ਪਤਾ ਲੱਗ ਜੂਗਾ ਇਹਦੀ ਖੁਰਾਕ ਕਿੰਨੀ ਐ ਇਹਦੀ ਬਸ ਕਰਾਣੀ ਇਹਦੇ ਕੋਲੋਂ ਸਾਰੀ ਰਾਤ ਪ੍ਰਸ਼ਾਦੇ ਪਕਾਉਂਦੀ ਰਹੀ ਵਿਚਾਰੀ ਮਾਣਾ ਮੂੰਹ ਪਕਾ ਛੱਡਿਆ ਪਕਾ ਕੇ ਰੱਖ ਲਿਆ ਜਿਸ ਵੇਲੇ ਰੱਖ ਲਿਆ ਤੇ ਸਵੇਰੇ ਉਹਨੂੰ ਛਕਾਇਆ ਉਹ ਦੇਹੀ ਗਈ ਉਹ ਛਕੀ ਗਈ ਉਹ ਦੇਹੀ ਗਈ ਉਹ ਛਕੀ ਗਈ ਸਾਰੇ ਛਕ ਲੈ ਸਾਰੇ ਛਕ ਲੈ ਤੇ ਉਹ ਫੇਰ ਵੀ ਅਕਸਰ ਇਨਸਾਨ ਇਨਸਾਨ ਹੈ ਬੜੀ ਪਰੇਸ਼ਾਨ ਹੋਈ ਕਹਿੰਦੀ ਵਸਤੇ ਨੇ ਹੁਣ ਵੀ ਨਹੀਂ ਕੀਤੀ ਉਹ ਛਕ ਜਦੋਂ ਉਹਨੇ ਖਤਮ ਹੋ ਗਿਆ ਉੱਠੇ ਉੱਠ ਕੇ ਆਪਣਾ ਕੰਮ ਕਰਨ ਲੱਗ ਪਏ ਭਗਤ ਆਪਣੇ ਅਕਾਲ ਪੁਰਖ ਉਹਨ ਜਿੱਦਾ ਸੁਭਾਅ ਹੁੰਦਾ ਬੀਬੀਆਂ ਦਾ ਉਹਨ ਆਪਣਾ ਕੰਮ ਚੱਕਿਆ ਇੰਡੀਆ ਉਹ ਨਹੀਂ ਪਹਿਲਾਂ ਕੱਤਦੇ ਆ ਫਿਰ ਉਹਨੂੰ ਅਟੇਰਦੇ ਆ ਤਾਂ ਫਿਰ ਅਟੇਰਨ ਹੁੰਦਾ ਕਿ ਇਦਾਂ ਇੱਕ ਫਰੇਮ ਹੁੰਦਾ ਉਹਦੇ ਉੱਤੇ ਇਦਾਂ ਚੜਾਉਂਦੇ ਉਹ ਅਟੇਰਨ ਚੁੱਕਿਆ ਚੱਕ ਕੇ ਗਵੰਡਨ ਤੇ ਚਲੀ ਕਹਿੰਦੀ ਆ ਕੀ ਗੱਲ ਐ ਬੜੀ ਥੱਕੀ ਜਾਪਦੀ ਐ ਕਹਿੰਦੀ ਕੀ ਦੱਸਾਂ ਕੰਮ ਰੱਖਿਆ ਸੀ ਤੇ ਉਹ ਮੈਨੂੰ ਪਤਾ ਨਹੀਂ ਲੱਗਦਾ ਮੈਨੂੰ ਲੱਗਦਾ ਸੀ ਭੁੱਖਾ ਨਾ ਰਹਿੰਦਾ ਹੋਵੇ ਤੇ ਮੈਂ ਉਹਨੂੰ ਪ੍ਰਸ਼ਾਦੇ ਦੀ ਬਸ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨ ਕੀਤੀ ਨਹੀਂ ਅੱਜ ਮੈਂ ਸਾਰੀ ਰਾਤ ਪਕਾਉਂਦੀ ਰਹੀ ਆ ਉਹ ਫੇਰ ਛੱਕ ਲਿਆ ਤੇ ਉਹਨ ਬਸ ਕੀਤੀ ਨਹੀਂ ਇਹ ਕਹਿੰਦੀ ਅਕਾਲ ਪੁਰਖ ਅਲੋਪ ਹੋ ਗਏ ਮੈਂ ਜਲਦੀ ਹੁਣ ਕਰਨੀ ਆ ਕਿਉਂਕਿ ਉਹ ਟਾਈਮ ਵੀ ਮੋਰੇ ਦੀਦਾ ਹੁਣ 20 ਮਿੰਟ ਰਹਿ ਗਏ ਆ ਅਸੀਂ ਥੋੜਾ ਜਿਹਾ ਹੋਰ ਵੀ ਪ੍ਰੋਗਰਾਮ ਹੈਗਾ ਆ ਤੇ ਜਿਸ ਵੇਲੇ ਅਲੋਪ ਹੋ ਗਿਆ ਤੇ ਘਰ ਆਈ ਨਾਰਾ ਕੇ ਦੇਖਦੀ ਆਵਾਜ਼ਾਂ ਮਾਰੇ ਨਾਰਾਇਣ ਨਾਰਾਇਣ ਨਾਰਾਇਣ ਕਿੱਥੇ ਬੋਲਣ ਨਾਰਾਇਣ ਟੈਲਪ ਹੋ ਗਿਆ ਪਰੇਸ਼ਾਨ ਹੋਈ ਜਿਉ ਕਰਦੀ ਕਰਦੀ ਬਰਲਾਬ ਕਰਨ ਲੱਗ ਪਈ ਇਹ ਨਾਰਾਇਣ ਕਿੱਥੇ ਗਿਆ ਮੈਨੂੰ ਤੇਰੀ ਲੋੜ ਹੈ ਨਾਰਾਇਣ ਕਿੱਥੇ ਗਿਆ ਮੈਨੂੰ ਤੇਰੀ ਲੋੜ ਹੈ ਭਗਤ ਆ ਗਿਆ ਤਰਲੋਚਨ ਕਹਿੰਦੇ ਕੀ ਹੋਇਆ ਰੌਲਾ ਪਾਇਆ ਕਹਿੰਦੀ ਕੀ ਦੱਸਾਂ ਨਾਰਾਇਣ ਹੈ ਨਹੀਂ ਗਾ ਮੈਂ ਉਹਨੂੰ ਵਾਜਾ ਮਾਰਦੀ ਪਤਾ ਨਹੀਂ ਕਿੱਥੇ ਚਲੇ ਗਿਆ ਉਹਨ ਵੀ ਵਾਜਾ ਮਾਰੀਆਂ ਜਨ ਨਾਰਾਇਣ ਨਾ ਮਿਲੇ ਅਲੋਪ ਹੋ ਗਏ ਫੇਰ ਕਹਿੰਦੀ ਆ ਫੇਰ ਪ੍ਰਗਤ ਕਹਿੰਦਾ ਤੈਨੂੰ ਮੈਂ ਕਿਹਾ ਸੀਗਾ ਕਿ ਉਹ ਸਧਾਰਨ ਨਹੀਂ ਹੈਗਾ ਇਹ ਅਕਾਲ ਪੁਰਖ ਹੈ ਜਿਸ ਵੇਲੇ ਫੇਰ ਦੋਨਾਂ ਨੇ ਬਹੁਤ ਬਰਲਾਭ ਕੀਤਾ ਨਾ ਫੇਰ ਨਾ ਆਵਾਜ਼ ਆਈ ਆਵਾਜ਼ ਆਈ ਹੇਤਰ ਲੋਚਨ ਤੂੰ ਕਿਉਂ ਪਰੇਸ਼ਾਨ ਹੋਣਾ ਹੈ ਕਿ ਮੈਂ ਤੇ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਉੱਥੇ ਨਹੀਂ ਠਹਿਰਦਾ ਇਸ ਕਰਕੇ ਕਹਿੰਦੀ ਆ ਮੈਂ ਜਲਦੀ ਖਤਮ ਕਰ ਉਹ ਫਿਰ ਕਹਿੰਦੀ ਆ ਕਿ ਹੇ ਅਕਾਲ ਪੁਰਖ ਹੇ ਨਾਰਾਇਣ ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ਤੁਸੀਂ ਬਸ ਕਿਉਂ ਨਹੀਂ ਕਰਦੇ ਸੀਗੇ ਛੱਕਦੇ ਨਾਰਾਇਣ ਕਹਿੰਦੇ ਬਸ ਕਿੰਦਾ ਕਰਦਾ ਜਿਹੜੇ ਪਿਆਰ ਨਾਲ ਤੂੰ ਦਿੰਦੀ ਸੀ ਨਾ ਖਾਣਾ ਮੈਨੂੰ ਮਾਤਾ ਉਸ ਪਿਆਰ ਨਾਲ ਤੂੰ ਤਾਂ ਖਾਣਾ ਹੀ ਦਿੰਦੀ ਸੀ ਇਸ ਕਰਕੇ ਮੈਂ ਬਸ ਨਹੀਂ ਸੀ ਕਰਦਾ ਸੋ ਭਗਵਾਨ ਜਿਹੜਾ ਇਹ ਪ੍ਰੇਮ ਦਾ ਵੱਧਾ ਹੁੰਦਾ ਰੱਬ ਬਸ ਭਗਤਾਨੇ ਕੀ ਤਪ ਰੇਮ ਦੀਆਂ